चलोक ਲੋਕ ਮਹੱਲਾ ਪੰਜਵਾ ਡਿੱਟੜੋ ਹੱਬ ਠਾਏ ਊਣ ਨਾ ਕਾਈ ਜਾਏ ਨਾਨਕ ਲੱਦਾ ਤਿੰਸਵਾਉ ਜਿਨ੍ਹਾਂ ਸਤਗੁਰ ਭੇਟਿਆ ਕਿਹੜੀ ਜਗ੍ਹਾ कमी ਕਵੀ ਨਹੀਂ ਹੈ ਜਿੱਤੇ ਉਹਨੇ ਰਚਨਾ ਬਣਾਈ ਹੈ ساری ਜਗ੍ਹਾ ਕੋ ਫਿਰਕੇ ਦੇਖ ਲਿਆ ਮੈਨੂੰ ਤਾਂ ਕੁਤੇ ਕਮੀ ਲੱਗੀ ਉਹਨਾਂ ਦੀ ਦ੍ਰਿਸ਼ਟੀ ਚ ਕਭੀ ਹੈ ਕਮੀ ਵਾਲੀ ਦ੍ਰਿਸ਼ਟੀ ਨਾਲ ਦੇਖਦੇ ਨੇ ਉਹ ਕਿਤੇ ਜਗ੍ਹਾ ਕੋਈ ਹੋਂਦ ਤਾਂ ਹੀ ਹੈ ਕਿਹੜੀ ਪੱਖੋਂ ਗੱਲ ਹੋ ਰਹੀ ਹੈ ਜੀ ਜਿਵੇਂ ਸ੍ਰੀ ਟੀਵੀ ਦੇ ਅੱਗੇ ਹਾਂਜੀ ਕੋਈ ਕਹਿੰਦਾ ਇਹ ਆ ਚਾਹੀਦਾ ਸੀ ਕੋਈ ਕਹਿੰਦਾ ਉੱਥੇ ਆ ਚਾਹੀਦਾ ਸੀ ਕੋਈ ਕਹਿੰਦਾ ਇਹ ਵਿਚਾਰੇ ਦੇ ਪੁੱਤੜੇ ਦੇ ਪੈਰ ਚਾਹੀਦੇ ਸੀ ਕੋਈ ਕਹਿੰਦਾ ਇਹਦੇ ਨੱਕ ਵੱਡਾ ਚਾਹੀਦਾ ਸੀ ਕੋਈ ਕਹਿੰਦਾ ਨੱਕ ਛੋਟਾ ਚਾਹੀਦਾ ਸੀ ਕੋਈ ਇੱਥੇ ਦਰਸ ਤੋਂ ਜ਼ਿਆਦਾ ਚਾਹੀਦੇ ਸੀ ਕੋਈ ਕਹਿੰਦਾ ਦਰਸ ਥੋੜੇ ਚਾਹੀਦੇ ਸੀ ਕੋਈ ਕਹਿੰਦਾ ਇੱਥੇ ਜ਼ਮੀਨ ਕੋਈ ਕਹਿੰਦਾ ਦੀ ਚਾਹੀਦੀ ਪੁਰ ਕੋਈ ਦਾ ਕੁਛ-ਕੁਛ ਦੀ ਲੋਕਾਂ ਦੇ ਮਸਲਬ ਦਾ ਸਭ ਕੁਝ ਨਹੀਂ ਹੈ ਇਹ ਕਹਿਣ ਦਾ ਮਸਲਾ ਹੈ ਕਿਉਂਕਿ ਡਿੱਠੋ ਠਾਏ ਲਿਖਿਆ ਠਾਏ ਦਾ ਮਕਿ ਭਾਵੇਂ ਸ੍ਰਿਸ਼ਟੀ ਚੇਤਨ ਦੀ ਗੱਲ ਹੋ ਰਹੀ ਹੈ ਜੈਦਰ ਵੀ ਨਹੀਂ ਅੱਛਾ ਇਹਦਰ ਤੋਂ ਚੇਤਨ ਤੋਂ ਹਰ ਜਗ੍ਹਾ ਹੁੰਨੇ ਨਾਨਕ ਲੱਦਾ ਤਿੰਨ ਸਵਾਉ ਜਿਨ੍ਹਾਂ ਸਤਿਗੁਰ ਭੇਟਿਆ ਆਹ ਨੂੰ ਲੱਭਿਆ ਸਵਾਉ ਬੁਢੋਰਤ ਉਹਨਾਂ ਨੂੰ ਪਤਾ ਲੱਗਿਆ ਤੋਬ ਰੋਰ ਤੋਂ ਇਹਨਾਂ ਨੇ ਸਤਿਗੁਰ ਭੇਟਿਆ ਉਹਨਾਂ ਨੂੰ ਤਾਂ ਪਤਾ ਲੱਗਿਆ ਵੀ ਇਹ ਕਿਉਂ ਬਣਾਏ ਪਹਾੜ ਦਰਿਆ ਇਥੇ ਦੀ ਓ ਕਿਉਂ ਬਣਾਏ ਨੇ ਇਥੇ ਦੀ ਉਹ ਕਿਉਂ ਦੀ ਬਣਾਏ ਉਹ ਗੱਲ ਨੂੰ ਸਮਝ ਗਏ ਜਿਹੜੇ ਨੇ ਉਹ ਆਪਣੀ ਆਪਣੀ ਜਵੜੀਆਂ ਵਾਰੀ ਜਾਂਦੇ ਨੇ ਜਿਹੜਾ ਸਤਗੁਰੂ ਮਿਲ ਲਿਆ ਉਹ ਨੇ ਜਨਨਾਂ ਤੋਂ ਉਹਨਾਂ ਨੂੰ ਕੋਈ ਕਮੀ ਲੱਗਦੀ ਕਿਤੇ ਪਰ ਜਿਹੜੇ ਮਨਮੁਖ ਨੇ ਉਹ ਜਗਾ ਜਗਾ ਕਮੀ ਲੱਗਦੀ ਮਹੱਲਾ 5 ਬਾਮਣੀ ਚਮਤਕਾਰ ਕਿਉ ਵਰਤਾਰਾ ਜਗਖੇ ਵਥ ਸੁਹਾਵੀ ਸੰਸਾਰ ਵਿੱਚ ਜਗ ਦਾ ਵਰਤਾਰਾ ਇਹੋ ਜਿਹਾ ਹੀ ਹੈ ਕਿਤੇ ਕਿਤੇ ਐਸੇ ਕੰਮ ਹੋ ਜਾਂਦੇ ਨੇ ਧਾਮਣੀ ਜਮਤਕਾਰ ਵਰਗੇ ਲੋਕ ਹਰਾਮ ਹੋ ਜਾਂਦੇ ਨੇ ਆਕੀ ਹੋ ਗਿਆ ਕਿਵੇਂ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ ਉਹ ਤਾਂ ਕੈਨ ਨਾ ਰੱਬ ਨੇ ਬੜਾ ਤਾਹਰ ਕੀਤਾ ਵਿਦਿਆਲੂ ਤਾਂ ਨਾ ਰਿਹਾ ਕਰਦੀ ਤੇ ਬਹੁਤ ਕੁਝ ਖੂਕ ਵੀ ਜਾਣਾ ਤੇ ਵਰਤਾਰਾ ਜੱਗ ਦਾ ਚਮਤਕਾਰ ਬਹੁਤ ਕੁਝ ਫਲਾਂ ਦੇ ਦਰਖਤਾਂ ਨੂੰ ਛਾੜ ਕੇ ਰੱਖ ਦਿੰਦੀ ਹੈ ਉਹ ਛਾੜ ਕਾਤੇ ਕੀ ਪਤਾ ਉਹ ਖਾ ਕੇ ਲੋਕ ਬਿਮਾਰ ਹੋ ਜਾਂਦੇ ਕੋਹੜਾ ਜ ਕੋਈ ਡਿਫੈਕਟ ਹੁੰਦਾ ਇਹ ਲੋਕ ਤੋਂ ਜਿੱਥੇ ਜਗਾ ਖੜੇ ਤੇ ਤੋੜਨ ਲੱਗਿਆ ਕੋਈ ਮਰੇ ਜਾਂਦਾ ਖਬਰਾਂ ਉਹਨੇ ਕੀ ਕੀਤਾ ਆਪਾਂ ਨੇ ਕੀ ਲੈਣਾ ਇਸ ਗੱਲ ਆਪਾਂ ਜੋ ਹੋ ਰਿਹਾ ਉਹਨੂੰ ਸੱਚ ਕਰਕੇ ਵਧੀ ਜਾਓ ਜਾਂ ਉਹਦੇ ਤੇ ਟਿੱਪਣੀ ਕਰਨ ਲੱਗ ਜਾਈਏ ਉਹਦੇ ਕੀਤੇ ਤੇ ਫਿਰ ਅਸੀਂ ਉਹਦੇ ਨਾਲ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਵਤ ਸੁਹਾਵੀ ਸਾਇ ਨਾਨਕ ਨਾਮ ਜਪੰਦੋ ਤਿਸਣੀ ਬਾਤੋ ਸੁਆਵੀ ਸਾਇ ਸਾਰੀਓ ਹੀ ਵਸਤੂ ਸੁਆਵੀ ਐ ਸੁਖ ਦੇਣ ਵਾਲੀ ਐ ਸੰਸਾਰ ਚ ਉਹ ਬਿਜਲੀ ਵੀ ਸੁਖ ਦੇਣ ਵਾਲੀ ਐ ਨੁਕਸਾਨ ਵੀ ਕਰ ਦਿੰਦੀ ਐ ਵੀ ਨੁਕਸਾਨ ਕਰ ਦਿੰਦੀ ਐ ਜੰਗਲਾਂ ਦੇ ਜੰਗਲ ਜાળ ਦਿੰਦੀ ਐ ਧੁੱਪ ਵੀ ਨੁਕਸਾਨ ਕਰ ਦਿੰਦੀ ਐ ਧੁੱਪ ਤੇ ਮੈਨੂੰ ਵੀ ਨਹੀਂ ਪੈਂਦਾ ਨਹਿਰਾਂ ਚੱਲਦੀਆਂ ਨੇ ਨਹਿਰਾਂ 'ਚ ਆਦਮੀ ਡੁੱਬ ਕੇ ਮਰ ਜਾਂਦੇ ਨੇ ਬਿਜਲੀ ਦੇ ਨਾਲ ਖੱਬਿਆਂ ਨਾਲ ਲੋਕ ਐਕਸੀਡੈਂਟ ਹੋ ਕੇ ਮਰ ਜਾਂਦੇ ਨੇ ਉਨੇ ਸਾਬ ਕੋ ਜੇ ਹਟਾ ਦਈਏ ਹਟਾਇਆ ਆਪਣੀ ਸਰਦਾ ਬਸ ਜੱਗ ਦੇ ਵਿੱਚ ਜੇ ਜੇ ਅਸੀਂ ਆਣਾ ਲੋਕ ਸਰਦਾ ਕਿਸੇ ਚੀਜ਼ 'ਚ ਬਣਾ ਬਨੇ ਨੁਕਸਾਨ ਹੁੰਦੇ ਰਹਿਣਗੇ ਪਊਗੀ ਗੱਲ ਤਾਂ ਸਾਬਦਾ ਦੀ ਨਾ ਰੱਖਦੀ ਹੈ ਸਾਡੀ ਅਸੀਂ ਸਾਬਦਾ ਨਕਾਦਰ ਕੀਤੀ ਰਹਿੰਦੇ ਸਾਬਦਾ ਨਕਾਦਰ ਆਪ ਵੀ ਦੋਸ਼ ਮੜਦੇ ਨੇ ਹਉਦੇ ਤੇ ਜਿਨਾ ਸਾਬਤਾ ਨਕਾਦਰ ਚੀਤ ਸਤ ਪਰ ਜਾਗਤਾ ਤੇ ਉਹ ਤੇ ਦੋਸ ਮੜਤਾ ਸੁਤੇ ਪਾਇਆ ਵਈਦਾ ਕਹਨੇ ਜੇ ਸੁਤੇ ਪਾਇਆ ਪੱਖਾ ਵੀ ਉਹ ਚੱਲੇ ਇਹਦਾ ਕਿਦਾ ਚੱਲੂ ਭਾਈ ਪੱਖਾ ਠੀਕ ਹੈ ਜੀ ਪੌੜੀ ਸਿਮਰਤ ਸਾਸਤਰ ਸੋਧ ਸਭ ਕੀਨੇ ਕੀਮ ਨਾ ਜਾਣੀ ਜੋ ਜਨ ਭੇਟੇ ਸਾਧ ਅਜਿਹੇ ਸੋਦੇ ਨੇ ਜੇ ਸੁਧ ਨਹੀਂ ਸੀ ਤਾਂ ਹੀ ਸੋਦੇ ਨੇ ਇਹ ਡਾਇਰੈਕਟਸ ਸਮੋਲ ਦੀਆਂ ਗੱਲਾਂ ਜਿਹੜੇ ਕਹੀ ਜਾਂਦੇ ਨੇ ਬਈ ਜੜੀ ਡਾਇਰੈਕਟ ਕਬੀੜੀ ਜਾਂਦੇ ਨੇ ਰਾਮ ਉਹ ਨਹੀਂ ਸੀ ਜਿਹੜਾ ਇਹ ਬੰਦੇ ਨੇ ਰਿਵਾਇਤ ਚ ਸਵੇਰ ਘੜਾਂ ਬੋਲੇ ਆ ਦਸਾਂ ਰਹੀ ਸੀ ਜਸਰ ਅਸਲ ਲਫ਼ਜ਼ ਵਰਤੇ ਉਹਦੇ ਵਾਸਤੇ ਇਹ ਕਹੀ ਜਾਂਦਾ ਨਹੀਂ ਜੀ ਉਸ ਵੇਲੇ ਦੀਆਂ ਰਿਵਾਇਤਾਂ ਸੀ ਗੁਰੂ ਸਾਹਿਬ ਨੇ ਵਰਤੀ ਅਸਲ ਦੇ ਵਿੱਚ ਇਹਨਾਂ ਦੀ ਗੁਰਬਾਣੀ ਪੜ੍ਹੀ ਹੋਈ ਈ ਈਨਾ ਨੇ ਗੁਰਬਾਣੀ ਇਕ ਵਾਰੀਓ ਪੜੀ ਨਹੀਂ ਹਜਾਰ ਵਾਰ ਗੁਰਬਾਣੀ ਪੜ੍ਹਦੇ ਨਾ ਇਕ ਵਾਰੀਓ ਹਜ਼ਾਰ ਵਾਰ ਇਹਨੂੰ ਪੜ੍ਹਦੇ ਆਰੇ ਨੂੰ ਪੜ੍ਹਦੇ ਸਟੱਡੀ ਕਰਕੇ ਝੋਕ ਕੇ ਫਿਰ ਕੋਈ ਚੁੱਕਾ ਨਹੀਂ ਛਿੜਣ ਹੁਣ ਲੱਗ ਜਾਣ ਪੜ੍ਹ ਝੋਕ ਕੇ ਹੁਣ ਲੱਗ ਕੇ ਜਾਣ ਬਾੜੀ ਕੋਲੇ ਐ ਫਰੇ ਜਾਣੂ ਦੂਰ ਬਾਤੇ ਆਪਾਂ ਨੇ ਦੱਸਤਾ ਕੁਝ ਲੈਣ ਸਾਰੇ ਆਪੇ ਹੋ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਔਰ ਜੇ ਜਾਣਬੁੱਝ ਕੇ ਦੱਲਣਾ ਹੋਵੇ ਉਹਦਾ ਕੋਈ ਇਲਾਜ ਨਹੀਂ। ਜੇ ਜਾਣਬੁੱਝ ਕੇ ਵਿਰੋਧ ਕਰਨਾ ਹੋਵੇ ਉਹਦਾ ਕੋਈ ਇਲਾਜ ਨਹੀਂ। ਉਹ ਪੰਡਤ ਵੀ ਕਰਦਾ ਰਹੇ। ਈਰਵੱਲੀ ਨੇ, ਰਾਮਰਈਏ ਵੀ ਕਰਦੇ ਰਹੇ ਨੇ। ਉਹ ਕਰਦੇ ਰਹਿਣਗੇ ਐਸ਼ਕਤੀ ਹੁੜੇ ਹੋ ਜਿਉਂਦੇ ਤੇ ਉਹ ਅਰਥ ਕੰਮ ਨਹੀਂ ਕਰਦੇ ਦੇ। ਭਾਈ ਗੁਰਦਾਸ ਦੀ ਜਦ 12 ਜੂਨ ਦੇ ਤੇ ਉਹ ਅਰਥ ਕੰਮ ਕਰਤੇ। ਸੋਧੇ ਕਰਦੇ ਨਾਲ ਕਹਿੰਦੇ ਤੇ ਉਹ ਦੇ ਤੇ ਚੱਕੇ ਬਹੁਤ ਬੜੀ ਸ਼ਰਾਰਤ ਐ ਤੇ ਨੋਦੇੜੀਆਂ 12 ਨੇ ਬਹੁਤ ਬੜੀ ਸ਼ਰਾਰਤ ਸੀ ਨੋਦਾ ਵਰਤ ਲਿਆ ਉਹਨੇ ਵਾਰ ਇੱਕ ਬੰਦੀ ਲਿਖੀ ਸਾਰੇ ਸਨਾਤਨੀ ਸਿੱਖ ਸੀਗੇ ਦੇ ਚੇਲੇ ਸੀ ਡੋਗਰੇ ਤਾਂ ਸਾਰੇ ਇਸ ਬਣ ਗਏ ਇਹ ਰਹਿ ਕੇ ਬਾੜੇ ਕਰ ਬੰਦੂ ਸਿੱਖੋ ਇਹ ਤਾਂ ਇਸ ਤੂ ਜੇ ਰਹਿ ਕੇ ਸਿੱਖੋ ਉਹਦੇ ਲਈ ਜਾਂਦੇ ਸਾਹਮਣੇ ਪਵਾਲੀਆਂ ਪੈਟਾ ਕਦੇ ਬਾਬੂ ਵਾਂਗੇ ਬਾਹੂ ਵਾਂਗੇ ਆ ਕੀ ਹੋਗੇ ਜੇ ਦਾ ਉਹ ਅਗਾਲਤਾ ਕਰ ਤੋ ਦੂਏ ਪਾਸੇ ਦੀ ਕੀ ਉਹ ਸੀ ਉਹ ਨੂੰ ਜਿਹੜਾ ਸੀ ਨਾ ਹੋਰ ਤਿਆਰੀ ਕਰ ਰਿਆ ਸੀ ਪਤਾ ਹੀ ਨਹੀਂ ਸੀ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕੀ ਲਿਖਿਆ ਹੈ ਗੁਰਬਾਣੀ ਇਤਿਹਾਸ ਸੀ ਫਬਰੂਅਰੀ ਦਾ ਸਾਸ ਤਾਰੇ ਸੋਧਲੇ ਤਾਂ ਕੀ ਕੀਮਤ ਨਹੀਂ ਸੋਧ ਕੇ ਵੀ ਕੀਮਤ ਨਹੀਂ ਜਾੜੀ ਰਿਸ਼ੀ ਮੁਨੀਆਂ ਨੇ ਗਲਤ ਲਿਖੇ ਹੋਏ ਤੇ ਰਿਸ਼ੀ ਮੁਨੀਆਂ ਦੀ ਕੋਈ ਵੈਲਿਊ ਨਹੀਂ ਕੋਈ ਵਿਦਵਾਨ ਤੇ ਰਿਸ਼ੀ ਬੁਲੀ ਜਿਹਨਾਂ ਨੇ ਗਲਤ ਲਿਖਿਆ ਹੋਇਆ ਤੇ ਸੋ ਇਹ ਉਹਨਾਂ ਦੀ ਕੀਮਤ ਪਾਈ ਜਾਂਦੇ ਨੇ ਇਹ ਉਹਨਾਂ ਦੀ ਕੀਮਤ ਵਧਾਈ ਜਾਂਦੇ ਦੀ ਗੁਰਬਾਣੀ ਨੇ ਤਾਂ ਕੱਚੇ ਲਾਏ ਪਏ ਨੇ ਸਾਰੇ ਇਹ ਫਿਰ ਕਹਿਣਾ ਚਾਹੁੰਦੇ ਆ ਵੀ ਸਿਮਰਤ ਸਾਸ਼ਤਰ ਅਸੀਂ ਜਾ ਕੇ ਪੜ੍ਹੇ ਆਂ ਵਿਚਾਰੇ ਆਂ ਕੋਈ ਕੀਮਤ ਨੀ ਪਤਾ ਲੱਗੀ ਇਹ ਕਹਿਣਾ ਉਹਾਂ ਦਾ ਜਹੀ ਨਹੀਂ ਕੁਝ ਨਹੀਂ ਨਹੀਂ ਵਿਚਾਰੇ ਨਹੀਂ ਸੋਧਦੇ ਨੇ ਉਹ ਸੋਧ ਕੇ ਵੀ ਦੇਖ ਲੈ ਸਾਮੀ ਦਖ ਨਹੀਂ ਆਉਣਾ ਚ ਵੀ ਕੀਮਤ ਨਹੀਂ ਹੈ ਉਹਾਂ ਵਿੱਚ ਬਹੁਤ ਇਤਿਹਾਸ ਲਾਇਏ ਹੋਏ ਨੇ ਜੋ ਜਨ ਭੇਟੇ ਸਾਧ ਸੰਗੀ ਸੋ ਹਰ ਰੰਗ ਮਾਣੀ ਜਿਹੜਾ ਜਨ ਸਾਧ ਸੰਗ ਸਾਧ ਦੀ ਸੰਗ ਭੇਟ ਕੇ ਲਿਆ ਸਾਧਨ ਨਾਲ ਜੁੜ ਗਿਆ ਉਹਨੇ ਹਜ਼ਰ ਬਾਣੇ ਨੇ ਬਾਕੀ ਕਿਸੇ ਨੇ ਹਲੰਦ ਸਿਮਰਤ ਸ਼ਾਸਤਰ ਵਾਲੇ ਨੇ ਬਾਣੇ ਹੁਣ ਦੱਸਣ ਦਾ ਸਹੀ ਉਹ ਕੋਈ ਕਿਸੇ ਢਲੇ 'ਚ ਖੜਾ ਸਿਮਰਤ ਸ਼ਾਸਤਰ ਵਾਲਾ ਕੋਈ ਕਿਸੇ ਢਲੇ 'ਚ ਖੜਾ ਕੋਈ 라ਵੜ ਨਾਲ ਖੜਾ ਕੋਈ ਰਾਮ ਨਾਲ ਖੜਾ ਕੋਈ ਕ੍ਰਿਸ਼ਨ ਨਾਲ ਖੜਾ ਕੋਈ ਕ੍ਰਿਸ਼ਨ ਦੇ ਵਿਰੋਧੀਆਂ ਨਾਲ ਖੜਾ ਉਹ ਤਾਂ ਬੈਰ ਵਿਰੋਧ ਕੰਮ ਕਰਉਂਦੇ ਗਰਫੇ ਹੋਏ ਨੇ ਸਾਰੇ ਜੂੜ ਬਕਾਰ ਮਾ ਲੋਭ ਰੋਦੇ ਦਰਸੇ ਹੋਏ ਨੇ ਸਨੇ ਕੁਲੇਸ਼ਨ ਉਹਨਾਂ ਦੇ ਗ੍ਰੰਥਾ ਬਤਾਵੇ ਦੇ ਦਰਸੇ ਹੋਏ ਨੇ ਅਸੀਂ ਕੋ ਇਲਜਾਮ ਸੁਣ ਹੀ ਲਾ ਰਹੇ ਜੋ ਜਨ ਸਾਧ ਸੰਗੀ ਸੋ ਹਰ ਹੋ ਜਾਂਦਾ ਸਾਧ ਦੀ ਸੰਗਤ ਦੇ ਵਿੱਚ ਰਹਿੰਦਾ ਸਾਧ ਨਾਲ ਜੁੜ ਜਾਂਦਾ ਹੈ ਉਹ ਹਰਦੇ ਰੰਗਾਂ ਦਾ ਹੈ ਹਰਦੇ ਰੰਗਾਂ ਦਾ ਉਹਨਾਂ ਤੋਂ ਨਾਮ ਦਾ ਬਾਣਦਾ ਠੀਕ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮस्तक ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਲਾਂ ਦੀ ਖਾਣ ਹੈ ਵਰਜੀ ਰਤਨ ਕੰਢ ਖੋਦੋ ਤਾਂ ਸਹੀ ਥੱਲੇ ਇਹਦੇ ਵਿੱਚ ਹੈ ਨਾਮ ਕਰਤਾ ਪੁਰਖ ਕਰਤਾ ਪੁਰਖ ਦਾ ਨਾਮ ਸੱਚ ਨਾਮ ਹੈ ਸੱਚ ਦੇ ਵਿੱਚ ਹੀ ਹੈ ਸਭ ਕੁਝ ਇਹ ਸੱਚ ਸਭਨਾ ਦਾ ਖਸਮ ਹੈ ਇਹਦੇ ਕੋਲ ਹੀ ਆ ਸਭ ਕੁਝ ਇਹਦੇ ਵਿੱਚ ਹੀ ਆ ਸਭ ਕੁਝ ਸਮਾਇਆ ਹੋਇਆ ਇਹ ਰਤਨਾ ਦੀ ਖਾਣੀ ਹੈ ਮਸਤਕ ਹੋਵੇ ਲਿਖਿਆ ਹਰ ਪ੍ਰਾਣੀ ਤੇਰੇ ਹਿਰਦੇ 'ਚ ਲਿਖਿਆ ਹੋਵੇ ਕੰਮ ਕਰਨਾ ਆ ਤੈਨੂੰ ਚੇਤਾ ਰਹਿਣਾ ਦਾ ਚੇਤਾ ਰਹਿਣਾ ਜਿਹੜਾ ਨਿਜ ਨੂੰ ਜਿਹੜੇ ਕੰਮ ਦਾ ਉਹੀ ਕੰਮ ਕਰਦਾ ਜਿਹੜਾ ਭੁੱਲ ਜਾਂਦਾ ਉਹ ਹੋਰ ਕੰਮ ਲੱਗ ਜਾਂਦਾ ਫਿਰ ਬੁਰਾ ਪਰਾਣੀ ਹਾਂਜੀ ਨਾਮ ਨਾਨਕ ਮਹਿਮਾਨੀ ਦਾ ਜਿਹੜਾ ਖਜਾਨਾ ਤੋਸਾ ਉਹ ਵਿਚੇ ਆਦੇ ਤੋਸਾ ਦੇ ਵਿਚੇ ਹੀਰੇ ਦਾ ਹੁੰਦੇ ਨੇ ਮੱਤ ਵਿਚੇ ਦਾ ਤਿਵਾਰ ਮਹਾਰਣਕੋ ਨਾਨਕ ਮੈਂ ਵਾਣੀ ਨਾਨਕ ਨੇ ਵਾਣਿਆ ਗਿਆਨ ਹੈ ਨਾਨਕ ਬੈਠਾ ਗਿਆਨ ਤੇ ਉਤੇ ਮਾਲਕ ਬੜਿਆ ਛੱਤ ਦੇ ਵਿੱਚ ਹੀ ਤੋਸ਼ਾ ਦਾ ਬੜੇ ਖਜ਼ਾਨੇ ਨੇ ਵਿੱਚ ਹੀ ਹੁੰਦਾ ਛੋਟਾ ਖਜ਼ਾਨਾ ਸਤਨਾਮ ਦਾ ਖਜ਼ਾਨਾ ਜਿਹੜੇ ਨੇ ਨਾ ਮੱਤ ਵਿੱਚ ਰਤਨ ਜੁਵਾਰ ਘਟਿਆ ਗੁਰਮੀਤ ਵਧੀਆ ਗੁਣਾ ਨੂੰ ਇਕ ਲਾਲ ਹੁੰਦਾ ਹੈ ਕਿ ਹੀਰਾ ਹੁੰਦਾ ਹੈ ਕਿ ਜਵਾਰ ਆ ਤਾਂ ਇੱਕ ਮਾਨਕ ਹੁੰਦਾ ਇੱਕ ਮੋਤੀ ਹੁੰਦਾ ਉਹਦੇ ਤਾਂ ਸਾਰੇ ਕੀਮਤੀ ਹੋਣੇ ਦਰਬਾਰ ਵੱਡਾ ਗੋਣਾ ਪੁਰੇ ਦਾ ਪਲਾਕਾ ਲਾ ਛੋਟੇ ਗੋੜ ਵੀ ਨੇ ਦਾਤਾ ਹੋਣਾ ਛੋਟਾ ਗੋਣਾ ਵੱਡਾ ਨਹੀਂ ਆਗਾ ਤੇ ਹੋਣਾ ਛੋਟਾ ਗੋਣਾ ਵੱਡਾ ਹੋੜੀ ਆਗਾ ਉਸ ਸ਼ਾਸ ਫਾਕੇ ਦਾ ਤੋਸ਼ਾ ਦੇਤਾ ਉਹਦੇ ਵਿੱਚ ਨਾਮ ਹੈ ਉਹਦੇ ਨਾਮ ਹੈ ਸਤਨਾਮ ਵਿੱਚ ਹੈ ਉਹ ਅਸਲ ਦੇ ਵੀ ਤਾਂ ਗਿਆਨ ਦਾ ਖਜ਼ਾਨਾ ਹੋਰ ਨਾਨਕ ਮਹਿਮਾਨੀ ਕਹਿ ਨਾਨਕ ਮਹਿਮਾਨ ਬਣਾ ਕੇ ਬਿਠਾ ਲਤਾ ਵੀ ਬਹਿ ਜਾ ਇੱਥੇ ਚੱਲ ਐਸ ਵਕਤ ਦਾ ਨਾਨਕ ਕੇ ਅਨਮਾਲਕ ਬਦਲਿਆ ਜਾਊ ਜਾਂ ਡਿਊਟੀ ਬਦਲ ਜਾਊ ਹਾਰੇ ਲੋੜੀਆਂ ਲੱਗੀ ਹੋਈ ਹੈ ਠੀਕ ਹੈ ਪਰ ਉਹ ਇੱਕੇ ਹੀ ਭਗਤ ਦਾ ਸਾਰ ਬੋਲੀ ਦਾ ਫਰਕ ਪਿਆ ਨਾ ਪਿਛੋ ਅੰਕੇ ਰਾਨਕ ਦੇ ਵਿੱਚ ਕਈ ਨੇ ਕਿਹੜਾ ਦੋ ਨੇ ਸਾਰੇ ਰਾਨਕ ਮਹਿਮਾਨ ਆਇਆ ਉਹ ਪਹਿਲਾਂ ਬੈਠੇ ਸੀ ਰਾਨਕ ਮਹਿਮਾਨ ਆ ਗਿਆ ਨਮਾ ਆ ਗਿਆ ਇਹ ਕਹਿ ਲੋ ਠੀਕ ਹੈ ਜੀ ਉਹ ਪੁਰਾਣੇ ਬੈਠੇ ਤੇ ਰਾਨਕ ਨਮਾ ਆਇਆ ਮਹਿਮਾਨ ਹੈ